ਇਸ ਤੇ ਹੋਏ ਤੋਂ ਨਹੀਂ ਬੁਰਾ ਔਰੇ ਕਹੋ ਕਿਨੇ ਕੁਛ ਕਰਾ ਔਰੇ ਕਹੋ ਕਿਨੇ ਕੁਛ ਕਰਾ ਇਸ ਤੇ ਹੋਏ ਨਹੀਂ ਕਿਛ ਬੁਰਾ ਜੀਵਤ ਦਾ ਕੁਛ ਬੁਰਾ ਹੋ ਨਹੀਂ ਸਕਦਾ ਆਪਾਂ ਕਹਿੰਦੇ ਵੇ ਇਹ ਤਾਂ ਕੁਛ ਕਰ ਨਹੀਂ ਸਕਦਾ ਸੰਸਾਰ ਚ ਫਿਰ ਜੀਵਨ ਦਾ ਬਣਾ ਹੋਰ ਕੀਤਾ ਕਿਨੇ ਕੀਤਾ ਵੀ ਨਾ ਨੇ ਕੀਤਾ ਵੀ ਨਾ ਨੇ ਇਹ ਸਭ ਕੁਛ ਪੁਰਾਣਾ ਤੇ ਹੋ ਨਹੀਂ ਸਕਦਾ ਕੀ ਤਬ ਨਹੀਂ ਆ ਗਾ ਕਰਦੇ ਇਹੀ ਨੇ ਪਰ ਪੁਰਾਣਾ ਤਾਂ ਕੁਝ ਹੋ ਨਹੀਂ ਸਕਦਾ ਪਹਿਲੇ ਵੀ ਗੱਲ ਨਹੀਂ ਹੱਥ ਕੀਤੀ ਪਹਿਲੇ ਵੀ ਗੱਲ ਤਾਂ ਕੀਤੀ ਹੋਦੀ ਪਹਲਾ ਤਾਂ ਚਲੋ ਬੜਾ ਤਾਂ ਚੰਗਾ ਭਈਆ ਜੇ ਗੱਲ ਤਾਂ ਲੇਖਾ ਦਾ ਗੁਰੇ ਦਾ ਹੀ ਜਣੇ ਪੁਰਾਣਾ ਜੱਕ ਲੈਣਾ ਨਹੀਂ ਪੁਰਾਣਾ ਲੈ ਲੋ ਇਹ ਤੇ ਬੋਰਾ ਦਾ ਕੁਝ ਹੋ ਨਹੀਂ ਸਕਦਾ। ਅਪਰਾਧਾ ਤੋਂ ਕੋਈ ਕਰ ਨਹੀਂ ਸਕਦਾ। ਹੋਏ ਆ ਕਿਹਾ ਕਿ ਸੋਚਣਾ ਕੁਝ ਹੋਰ ਗੱਲ ਹੈ ਹੁਣ ਹੋਰ ਗੱਲ ਹੈ। ਕਰੇ ਦੀ ਹੋਏ ਦੇ ਫਰਕ। ਜਿਹੜਾ ਕਰਨਾ ਉਹ ਬੁੱਧ ਲਾ ਬੁੱਧ ਜੋ ਕੁਝ ਕੀਤਾ ਸੋਮਨ ਕਰਦੀ ਉਹਨਾਂ ਹੋਏ ਲੱਗਦਾ ਵਰਤਿਆ ਕਰੇ ਕਰਨਾ ਨੀ ਵਰਤਿਆ ਕਿ ਨੀ ਵਰਤਿਆ ਉਹ ਤੇ ਕੀਤਾ ਲੋੜੀਏ ਕਬ ਸੋਹਰ ਪਿਆਸੀ ਹੈ ਇਸ ਤੇ ਹੋਏ ਨਹੀਂ ਕਛ ਇਸ ਤੇ ਹੋਏ ਸੋ ਨਹੀਂ ਬੁਰਾ ਇਸ ਤੇ ਹੋਏ ਬੁਰਾ ਜੋ ਇਹ ਤੇ ਕੁਛ ਹੁੰਦਾ ਉਹ ਬੁਰਾ ਨਹੀਂ ਉਹ ਬੁਰਾ ਨਹੀਂ ਤੋ ਇਹ ਤਾਂ ਬਜਾ ਰਿਹਾ ਕਰਦਾ ਇਹ ਤੇ ਬੁਰਾਈ ਨਹੀਂ ਹੁੰਦੀ ਉਹ ਦੀ ਹਾਂ ਔਰ ਇਹ ਕਹੋ ਕਿ ਨਾ ਔਰ ਇਹ ਕਹੋ ਕਿ ਨੇ ਕੁਛ ਕਰਾ ਇਸ ਲਫ਼ਜ਼ ਵਰਤਿਆ ਜੇ ਉਸੋਂ ਦਾ ਫਿਰ ਪਰਮੇਸ਼ਰ ਵਾਸਤੇ ਹੁੰਦਾ ਇਸੇ ਬਰਤੇ ਹੈ ਕਿ ਜੇ ਲਫ਼ਜ਼ ਉਹਦੇ ਵਾਸਤੇ ਵਰਤਦਾ ਅਸੀਂ ਉਸ ਵਾਲੇ ਆਦ ਕਰੀ ਗਏ ਆ ਬਹੁਤ ਵਾਰ ਕਰਦੇ ਇਸ ਕਰਕੇ ਕਿ ਪਹਿਲਾ ਉਸ ਵਾਲੇ ਅਰਥ ਜਦ ਪੂਰੇ ਪੱਕੇ ਹੋ ਜਾਂਦੇ ਇਸ ਵਾਲੇ ਅਰਥ ਤਾਂ ਹੀ ਮੰਨੇ ਉਹਨਾਂ ਦੀਫਤ ਪਰ ਮਾਇਸਰ ਜਦ ਦੀ ਬਰੌਤਾ ਕੋ ਛੋਟ ਦੱਸੋ ਕਿ ਨਾ ਕੋਈ ਕੀਤਾ ਸੀ ਇਹ ਕਹਿੰਦੇ ਵੀ ਜਿਹੜੇ ਜੀਵਨ ਨੇ ਕੀਤਾ ਵੀ ਕੁਝ ਨਹੀਂ ਅਸੀਂ ਐਂ ਕਹਿ ਦਿੰਦੇ ਸੀ ਗੱਲ ਉਹੀ ਆ ਅਰਥੋਛੀ ਕਿਲੇ ਜਾਂਦੇ ਨੇ ਪਰ ਇਥੇ ਸਿੱਧੇ ਅਰਥ ਇਹ ਨੇ ਕਿ ਜੀਵ ਤੇ ਕੁਝ ਵੀ ਬੁਰਾ ਨਹੀਂ ਹੁੰਦਾ ਫਿਰ ਹਰ ਦਸੋ ਜੀਵ ਤੇ ਨਾ ਕਰਦਾ ਕੌਣ ਹੈ ਆਪ ਪਰਾ ਕਰ ਤੂ ਤਾਂ ਅਦਿ ਨੀਕੀ ਆਪੇ ਜਾਣੇ ਆਪਣੇ ਕੀ ਰੱਖੋ ਆਪ ਭਲਾ ਹੋ ਔਰ ਉਹ ਤੇ ਬੁਰਾਈ ਹਜ਼ਰਦਾ ਔਰ ਨਾ ਬੁਰਾਈ ਕਿਨੋ ਆ ਔਰ ਆਪ ਭਲਾ ਬਣਿਆ ਅੰਦਰ ਬੈਠਾ ਅੰਦਰ ਹੁਕਮ ਚਲਾਈ ਜਾਂਦਾ ਆਪੇ ਰਚਿਆ ਸਭ ਕੁਝ ਦਾ ਆਪਲਾ ਕਰਤੂ ਦਾਖ ਦੇ ਕਿ ਆਪਣੇ ਕਰਤੂਤ ਵੀ ਵਧੀਆ ਛੋੜੀ ਨਹੀਂ ਹੋਈ ਉਹ ਕਹਦਾ ਵੀ ਉਹਦਾ ਕਹਿਦਾ ਬੁਰਾ ਕਰਦਾ ਹੀ ਨਹੀਂ ਉਹਦਾ ਲੋਕ ਬੁਰਾ ਕਹਿੰਦਾ ਹੀ ਨਹੀਂ ਉਹ ਕਰਾਉਣ ਵਾਲੇ ਨੂੰ ਕੋਈ ਨਹੀਂ ਕਹਿੰਦਾ ਆਪਲਾ ਬਣਿਆ ਬੈਠਾ ਕਰਤੂਤ ਵੀ ਵਧੀਆ ਬਣਾਈ ਬੈਠਾ ਆ ਜਿਹੜੇ ਜੀਵਾਂ ਦੇ ਕਰਾਈ ਜਾਂਦਾ ਬਦਨਾਮੇ ਨਾਲ ਹੀ ਕਰਾਈ ਜਾਂਦਾ ਸਿੱਖਣ ਵਾਲੀ ਉਹਨਾਂ ਕਰੀ ਜਾਂਦੇ ਫਰ ਦੂ ਤੱਕ ਦੇ ਆਪੇ ਜਾਣੇ ਆਪਣੀ ਜੀਂਦੀ ਨਾਲੇ ਆਪਣੀ ਗੱਲ ਆਪੇ ਜਾਣਦਾ ਵੀ ਇਹ ਤਾਂ ਮੇਰੇ ਹੀ ਬਲਾ ਬੋਲਦਾ ਮੇਰੇ ਕੋ ਐ ਕਰਦਾ ਉਹ ਪਾਗਲ ਜੀਵ ਹੈ ਜਿਹੜਾ ਕਹਿੰਦਾ ਮੈਂ ਕੀਤਾ ਸਦਾ ਤਾਂ ਇਹ ਹੈ ਵੀ ਇਹਦਾ ਕਹਿੰਦਾ ਮੈਂ ਕੀਤਾ ਉਹ ਜਦ ਨਾਲ ਜਦ ਕਹੀ ਜਦ ਮੈਂ ਕੀਤਾ ਕੀਤਾ ਹੈ ਨਹੀਂ ਉਹ ਭਰਮ ਕਰਕੇ ਮੈਂ ਕੀਤਾ ਤੇ ਭਰਮ ਕਰਕੇ ਜਹ ਮੈਂ अपराध नहीं अपराध करके जरूरी नहीं भ्रम कर जाए यानी ये भ्रम ला के मैं आ मैं कीता अपराध करेंगे अपराध करेंगे जरूर अपराध का लेवल तो बेकाबू हो गया और बेकाबू हो गया मेरा जी तो कुछ हो गया फिर ਆਪੇ ਭਲਾ ਕਰ ਤੋ ਦਾ ਤਰੀਕੀ ਆਪੇ ਜਾਣੇ ਆਪਣੇ ਜੀ ਕੀ ਆਪੇ ਜਾਣੇ ਆਪਣੇ ਜੀ ਕਿ ਆਪਣੇ ਜੀ ਦੀ ਆਪੇ ਜਾਣਦਾ ਦੇਖ ਕੀ ਕਰ ਰਿਹਾਦਾ ਸੀ ਜੇ ਸੋਚਦਾ ਪਹਿਲੇ ਹੱਥ ਵੜ ਲੈਂਦਾ ਜੇ ਕਰ ਮਾਰਦਾ ਕੋਈ ਹੱਥੋ ਥੀ ਫੜਨ ਦਾ ਕਿਦਾਂ ਤੇ ਆਜਾ ਗੋਲੀ ਮਾਰਦਾ ਬੜਾ ਜਿਆ ਹਾਲਾਦਾ ਐਨੂੰ ਰੋਹੀ ਜਾਂਦੀ ਤੇ ਬਾਅਦ ਵਿੱਚ ਦੇਖਦਾ ਸੋਚ ਹੋ ਗਿਆ ਉਹ ਪੱਜ ਥੋੜਾ ਜਿਹਾ ਹਲਾਇਆ ਦੇਣਾ ਉਹ ਹੁਣ ਕੋਈ ਨਾਲ ਆਦਮੀ ਦੇਖਦਾ ਵੇ ਕੀ ਕਰਦਾ ਜਦੋਂ कोई ਮਾਰਵਾਦ ਦਾ ਉਹ ਪਿੱਛੋ ਫੜ ਲੈਂਦਾ ਹੈ ਹਾਲਾਤ ਦਾ ਪੂਰੇ ਕੁਸ ਕਰ ਦਿੰਦਾ ਹੈ आप साच- ਜੀ ਆਪ ਸੱਚ ਧਾਰੀ ਸਭ ਸੱਚ ਉਹ ਤੋਦ ਆਪਨ ਸੰਗ ਰਾਜ ਆਪਨ ਸੰਗ ਰਾਜ ਆਪ ਸੱਚ ਧਾਰੀ ਸਭ ਸੱਚ ਆਪ ਆਪ ਸਤਿ ਸਰੂਪ ਹੈ ਜੋਤ ਜੋ ਵੀ ਧਾਰਨ ਕੀਤੀ ਹੈ ਜੋਤ ਸੱਚੀ ਸੁੱੱਚੀ ਜੋਤ ਧਾਰਨ ਕੀਤੀ ਹੈ। ਸ਼ਬਦ ਗੁਰੂ ਨੇ ਸੱਚ ਸ਼ਬਦ ਹੈ ਤੇ ਸੱਚ ਨਹੀਂ ਹੈ। ਤੇ ਸੱਚ ਲੱਗਿਆ। ਸੱਚ ਮੂਲ ਹੈ। ਸੱਚ ਮੂਲ ਹੈ ਸੱਚ ਹੋਈ ਹੋਈ ਚੀਜ਼। ਸ਼ਬਦ ਜਿਹੜਾ ਪੈਦਾ ਹੋਇਆ ਨਾ ਹੁਕਮੋਂ ਹਾ ਹੁਕਮ ਸੱਚਾ ਹੁਕਮ ਸੱਚਾ ਸੱਚ ਸ਼ਬਦ ਸੱਚ ਸ਼ਬਦ ਤੋਂ ਮੁਕਤ ਨਾ ਹੋਏ ਹੋਏ ਆਪ ਸੱਚ ਸ਼ਬਦ ਬਾਤ ਜੋ ਸੱਚ ਨੇ ਇਹਨੂੰ ਸਾਚ ਲਗੂਆ ਹਾਂ ਜੋ ਸੱਚ ਨੇ ਜਿੰਨੀਆਂ ਵੀ ਧਾੜਾਂ ਕੀਤੀਆਂ ਨੇ ਜਿਨ੍ਹਾਂ ਨੂੰ ਨਾਲ ਬੁਲਾਇਆ ਆਪਣੇ ਉਹ ਵੀ ਸੱਚ ਨੇ ਸਾਚ ਸਚਿਆਰਿਆਂ ਜਿੰਨੀਆਂ ਅਸੀਂ ਹਾਂ ਜੋ ਤਾਂ ਨੇ ਕੂੜਿਆ ਕੋਈ ਵੀ ਨਹੀਂ ਵਿੱਚ ਮਾਇਆ ਆਪਣੇ ਕੂੜਿਆ ਦਾ ਕੋਈ ਖਲਾਇਆ ਵਿੱਚ ਜਿੱਤੇ ਹੀ ਕੂੜਿਆ ਦਾ ਮੈਨੂੰ ਤਾਂ ਖਲਬਲੀ ਪੈਦਾ ਹੋ ਜਾਂਦੀ ਜਿੱਤੇ ਖਲਬਲੀ ਪੈਦਾ ਹੋ ਜਾਂਦੀ ਉਹ ਕੂੜਿਆਰਾ ਬੇਸੁਰਾ ਜੇ ਸੁਰੇ ਵਗਾੜ ਦਿੰਦਾ ਹੋਵੇ ਹਾਂਜੀ ਆਪ ਸਾਜ ਧਾਰੀ ਸਾਹਿਬ ਸਾਜ ਉਹ ਬੋਤ-ਬੋਤ ਆਪਨ ਸੰਗ ਰਾਜ ਉਹ ਕਰਕੇ ਆਪਣੇ ਸੰਗ ਬੁਲਾ ਲਿਆ ਵਿਚੇ ਦਰ ਗਿਆ ਆ ਰਾਜ ਵਿਚੇ ਮੈਂ ਸੋਦੀ ਉਹਦੀ ਲਪਦੀ ਨਹੀਂ ਵਖਰੀ ਆਵਾਜ਼ ਰਾਗੀ ਆ ਰਾਗੀ ਗਉਣਾ ਉਹ ਵੇ ਇਤਰੀ ਵਾਈ ਬੱਕਰੀ ਹੈ ਲੱਭੇ ਤੀ ਸੰਦੀ ਉਹ ਬੋਤ ਬੋਤ ਆਪਨ ਰਾਜ ਤਾਂ ਕਿ ਗੱਦ ਵਿੱਚ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਚੀ ਪਾਈ ਆਪਟ ਸੰਗ ਰਾਜ ਉਹਨੂੰ ਆਪਣੇ ਨਾਲ ਐ ਮੈਂ ਸਭ ਕੱਲਿਆ ਜਿਵੇਂ ਆਪ ਜੋ ਜਿਵੇਂ ਜੋਤੀ ਜੋਤ ਮਿਲ ਜਾਂਦੀ ਆਕੇ ਜਿਵੇਂ ਜਾਲਾ ਦੁੱਧ ਬਣ ਜਾਂਦਾ ਪਾਣੀ আর ਦੁੱਧ ਬਣ ਜਾਂਦਾ ਐ ਆਪਣੇ ਨਾਲ ਬਰਦਾਸ਼ਤ ਕਿਤੇ ਵੀ ਨਹੀਂ ਪਤਾ ਹੈ ਵੀ ਕਿੱਥੇ ਪਾਣੀ আর ਦੁੱਧ ਵਿੱਚ ਕਿੱਥੇ ਜੋੜ ਹੈ ਜੋੜ ਨਾ ਲੱਗਦਾ ਕਿ ਪਾਣੀ ਦਾ ਦੁੱਧ ਐ ਆਤਮਾ ਦਾ ਆਤਮਾ ਸ਼ਬਦਾਂ ਦਾ ਸ਼ਬਦ ਮਰ ਗਿਆ ਇਹ ਪਾਣੀ ਸੰਤ ਉਹ ਪਾਣੀ ਦਾ ਕਿਨ ਤੇ ਪਾਣੀ ਸੰਤ ਜੋ ਪਾਣੀ ਸੰਤ ਆਪ ਸਾਚ ਸਭ ਸਾਚ ਉਤਪਉਤ ਹੋ ਗਿਆ ਨਾ ਪਾਣੀ ਨਾਲ ਪਾਣੀ ਜਦੋਂ ਉਤਪਉਤ ਹੋ ਜਾਂਦਾ ਹੈ ਰੂਪ ਹੋ ਜਾਂਦਾ ताकि गद में कहीं ना जाए दूसर होए तो सोच ही पाए ताकि गद कहीं ना जाए जदो एक गद हो ना उस बोत आपसंग राज पर ब्रह्म हो जाता है ये कौन के हो गया होता है ओदी गद फिर बल देती चीज ओदी गद फिर आप ही बल बनन पावन कर दवे ताकि गद में तो कहीं ना जाए बारे में कुछ चाह जाता है ਜਦੋਂ ਉਸ ਪੋਟ ਆਪਣਾ ਰਾਜ ਚਲਾਇਆ ਤੇ ਕੋਹ ਕਿਉਂ ਗਿਆ ਆ ਅਸ ਉਹ ਤਾਂ ਬਾਹਾਂ ਸੀ ਬੈਣ ਉਹ ਤਾਂ ਬਹੁਤ ਆ ਵੱਧ ਤਾਂ ਕੋਈ ਰੁੱਤੀ ਹੁਣ ਤੋਏ ਕਾ ਕੇ ਭੈਣ ਅੱਗੇ ਦਾ ਬਿਆਨ ਨਹੀਂ ਸੀ ਰੁੱਤ ਵੀ ਪਿਛਲੀ ਉਹ ਗੱਲ ਐ ਉਹ ਤੋਂ ਅੱਗੇ ਜੀ ਨਹੀਂ ਹੈ ਕਹਿੰਦੇ ਜਦ ਤਾਂ ਜਦ ਰੁੱਤ ਹੋਵੇ ਉਹ ਤੇ ਸ਼ਰਤ ਹੈ ਜੁੱਤੀ ਤੇ ਜਮੇ ਤੇ ਬਾਅਦ ਤਾਂ ਕੋਈ ਨਹੀਂ ਕੁਝ ਨਹੀਂ ਜਦੋਂ ਇੱਕੋ ਕੇ ਗੁਰੂ ਆ ਉਹਦੀ ਗੱਲ ਵਿੱਚ ਨਹੀਂ ਕਰੀ ਜਾਂਦੇ ਅੱਗੇ ਦੀ ਗੱਲ ਹੁੰਦਾ ਅੱਗੇ ਦਾ ਵੱਧ ਹੋਰ ਦੂਸਰ ਹੋਏ ਤਾਂ ਸੋਚ ਹੀ ਹਾਂ ਉਹਦੀ ਸੋਚੀ ਨਹੀਂ ਗੱਲ ਪਤਾ ਨਹੀਂ ਲੱਗਦਾ ਵੀ ਕੋ ਗੁਰੂ ਗੁਰਾ ਕਿਹਨੇ ਉਹ ਕੋਈ ਦੂਸਰਾ ਦਾ ਉੱਥੇ ਉੱਥੇ ਗੁਰਦੇ ਮਾਤਾ ਗੁਰਦੇ ਪਤਾ ਦੀ ਲੋੜ ਉਹ ਤਾਂ ਗੁਰ ਦੀ ਲੋੜ ਹੈ ਉੱਥੇ ਗੁਰ ਪ੍ਰਸਾਦ ਕੇ ਤੱਕ ਉੱਥੇ ਕੋਈ ਚਾਹੀਦਾ ਗੁਰਦੇ ਦੁਆ ਚਾਹੀਦਾ ਸੋਚੀ ਦੇਣ ਵਾਸਤੇ ਜੀ ਜੇ ਵੀ ਸੋਚੀ ਦੀ ਗੱਲ ਕਰੀਏ ਤਾਂ ਦੂਜਾ ਚਾਹੀਦਾ ਆ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਲਿ ਇਹ ਜਾਨ ਤਿਸ ਕੀਆ ਸਭ ਪਰਵਾਨ ਇਹ ਸਤਿ ਪਰਵਾਨ ਉਹਦਾ ਜਿਹੜਾ ਕੀਤਾ ਹੋਇਆ ਨਾ ਸਾਰੇ ਪ੍ਰਵਾਨ ਕਰਨਾ ਚਾਹੀਦਾ ਤਿਸ ਕਾ ਕੀਆ ਸਭ ਪਰਵਾਨ ਸਤਿ ਪਰਵਾਨ ਸਭ ਪ੍ਰਵਾਨ ਹੈ ਜੇ ਜਿਹੜਾ ਕੋਹ ਕੋ ਉੱਗੇ ਆਇਆ ਉਹਦਾ ਕੀਤਾ ਹੋਇਆ ਦਰਗਾਹ ਪ੍ਰਵਾਨ ਹੈ ਅਜਾ ਪ੍ਰਵਾਨ ਹੈ ਦਰਗਾਹ ਜ ਪ੍ਰਵਾਨ ਹੈ ਜੇ ਦਰਗਾਹ ਪ੍ਰਵਾਨ ਹੈ ਕੀਤਾ ਹੋਇਆ ਤਾਂ ਜੋ ਦਰਗਾਹ ਦਾ ਕੀਤਾ ਹੈ ਇਹ ਵੀ ਪ੍ਰਵਾਨ ਕਰਨਾ ਚਾਹੀਦਾ ਕਿਉਂਕਿ ਉਹ ਪ੍ਰਵਾਨ ਕਰਦਾ ਅਸੱਦਾ ਕੀਤਾ ਜੋ ਦਰਗਾਹ ਦਾ ਕੀਤਾ ਹੈ ਇਹ ਪ੍ਰਵਾਨ ਕਰ ਇਹਦਾ ਦੇਖ ਕੇ ਆਪਾਂ ਫਰਕਾ ਦਾ ਹਰਦਾ ਲਾਉਣਾ ਉੱਥੇ ਦਾ ਮੈਸੇਜ ਇਹਨੂੰ ਪ੍ਰਵਾਨ ਕਰ ਕੋਮ ਉੱਥੇ ਦਾ ਇਹ ਪ੍ਰਵਾਨ ਕਰਨ ਵਾਲਾ ਐਂ ਦੀ ਇਹ ਹੁਕਮ ਕਰਨ ਵਾਲਾ ਪ੍ਰਵਾਨ ਉੱਥੇ ਕਰਨ ਵਾਲਾ ਇਹ ਪ੍ਰਵਾਨ ਦੇਣਾ ਇਹ ਪ੍ਰਵਾਨ ਹੁਕਮ ਦੇ ਵਿੱਚ ਕੇ ਕੰਮ ਨਹੀਂ ਚੁੱਕੀ ਸੋ ਹੁਕਮ ਹੋਤ ਨਹੀਂ ਹੋ ਜੀ ਹਾਂ ਉਹ ਜਿਹੜਾ ਦਰਗਾ ਚੱਲੇ ਜਿਸ ਦਾ ਕੀ ਹੈ ਦਰਗਾ ਚੱਲੇ ਅਨੇੜਾ ਲੱਗ ਜੇ ਇਹ ਇਹਦਾ ਪੁੱਠਾ ਅਰਥ ਲੈਣਾ ਜੋ ਇਹ ਕਹਿ ਰਿਹਾ ਉਹਦਰ ਦਾ ਚਲਦਾ ਜੀ ਜੋ ਦਰਗਾਹ ਚਲਦਾ ਉਹ ਇਹ ਕਹਿਦਾ ਕਹਿ ਰਿਹਾ ਜੋ ਦਰਗਾਹ ਆ ਹੁਕਮ ਹੋ ਰਿਹਾ ਬਿਆਨ ਕਰ ਰਿਹਾ ਅਰਥ ਇਹ ਸੀ ਅਰਥ ਕਰ ਲੈ ਪੁੱਠੇ ਜੋ ਦਰਗਾਹ ਇਸਕਾ جس کا کہے اندر کا چل رہے وہ رغبتی ہو رہی یہ اس نے جتہ کیا تھا پرمان اس نے اس کا کیا تھا پرمان اور اس راایا نہ تیسا یہ ਦਰਗਾਹ ਕੀ ਦਿੱਤੀ ਤਸਦੀਕ ਪ੍ਰਵਾਨ ਗੁਰਪ੍ਰਸਾਦ ਨਾਨਕ ਇਹ ਕਿਰਪਾ ਨੇ ਸਮਝੋ ਨਾਨਕ ਦਰਗਾਹ ਦਾ ਕੀਤਾ ਹੋਇਆ ਜੋ ਹੁਕਮ ਹੈ ਜੋ ਹੋ ਰਿਹਾ ਹੈ ਪਾਣਾ ਉਹ ਪ੍ਰਵਾਨ ਕਰ ਕਦੋਂ ਹੈ ਇਹ ਜੋਗ ਹੈ ਪ੍ਰਵਾਨੇ ਕਰਨਾ ਚਾਹੀਦਾ